दोहरा रिख कहो तुम ਮੈ मैं बसै ताह हिलिया त्रिय मनसा वाचा कर्मणा बस कर राखो पी सुरी आश्री किन्नरनी ता समझ और न कोए रूपवती त्रैलोक में तासी और न होए शिवा सची सीता सती ता को रूप निहार राध नार निहराय ਰੂਪ अहल्या को निरख रीज रह्यो सुरराज अड़िल बासब की चमहेर क्रियाहु बास पई बिरास मुंद के बीज बूड़ सब ही गई तीन लोक को नाथ जो पेटन पाई है ओ जोवन जड़ ਕਉਨੁ ਪਾਇ ਸ੍ਰੀ ਸਹਿ ਪਈਐ ਪਠਾਇ ਸਾਤਰੀ ਬੁਲਈਐ ਇਕ ਰਹਿਣ ਜੋ ਪੇਟਨ ਪਾਉ ਤਾ ਪਰਸਮੋ ਸਖੀ ਬਲ ਜਾਉ ਦੋਰਾ ਜੋਗਨੇ ਸ੍ਰੀ ਸਾਚਰੀ ਸੋ ਤਿਨ ਲਈ ਬੁਲਾਏ ਸਕਲ ਭੇਦ ਸਮਝਾਇ ਕ ਹਾਰਿ ਦਈ ਪਠਾਇ ਜਾਏ ਕਹੋ ਸੁਰ ਰਾਜ ਸੋ ਭੇਦ ਸਕੀ ਸੁਝਾਏ ਸੁਣ ਤੋ ਆਇ ਲਿਆ ਕੀ ਬ੍ਰਿਥਾਰੀ ਰਹੋ ਸੁਰ ਰਾਏ ਸੋ ਯਾ ਬਾਰ ਗਰੀਬ ਸੰਭਾਰ ਸੁਨ ਹਰੀ ਭਾਲ ਬਿਖੈ ਬਿੰਦੀ ਉਹ ਨੰਦੀ ਉਹ ਹੈ ਤਾਮਨ ਸੋ ਕਿਉਂ ਤਾਇ ਕਰਿਓ ਜਿਨੇ ਆਜ ਲਗੇ ਨਾ ਸ਼ਿੰਗਾਰ ਕੀਓ ਹੈ ਬੀਰੀ ਚ ਸਕੈ ਨਾ ਸਕੀ ਪਰ ਪਾਇ ਰਹੀ ਨਹਿ ਪਾਨ ਪੀਓ ਹੈ বেগ ਚਲੋ বানি বaithe kaha mar manan ਕੋ to manu moh edio hai kroor karlav karay kamala chhin dhios nisakab hunai sovae saampan jho saska chetu upar lok ki laaj savay hat khovae haar shingar karay nah sundare aasman sau sasianan thove beg chalo ban baithe kaha sab marg ko muni manan jovae baat ਬੀਰੀ ਚ ਵਾਇਸੋ ਬੇਕ ਬਨਾਏ ਸੋ ਬਾਰਹਿ ਬਾਰ ਸ਼ਿੰਗਾਰ ਸਵਾਰ ਹੈ ਕਾਤ ਪਛਾਨ ਚਲਿਓ ਤਿਤ ਕੋ ਮੂਨੀ ਸ਼ਰਾਪ ਕੇ ਤਾਪ ਚੁਕੈ ਜਿ ਧਿਕਾਰ ਹੈ ਜਾਏ ਸਕੈ ਹਟੂ ਨਾ ਰਹੈ ਮਤਵਾਰੇ ਕੀ ਭਾਂਤ ਡਿਗੈ ਪਿਆਰੇ ਜੂ ਆਜ ਤਿਹਾਰੇ ਭਏ ਹੈ ਭੇਟਨ ਕਉ ਮਹਾਰਾਜ ਸਮੈ ਮੂਨੀ ਰਾਜ ਧਿਆਨ ਮੋ ਆਜ ਗਏ ਹੈ ਮੀਤਾ ਲਿੰਗਨ ਚੁੰਬਨ ਆਸਨ ਭਾਂਤ ਅਨੇਕਨ ਆਨ ਲਏ ਹੈ ਮੂਰਤ ਬੜਿਓ ਮਨ ਭਾਵਨਿ ਕੇ ਮਨ ਜਾ ਚਿਤ ਤੇ ਵਿਸਰਾਏ ਦਏ ਹੈ ਦੋਹਰਾ ਬਨਿਓ ਠਣਿਓ ਸੁੰਦਰ ਕਨੋ ਤੀਨ ਲੋ ਕੋ ਰਾਏ ਬਾਸਵ ਸੋਪਤ ਪਾਇ ਤ੍ਰਿਏ ਮੁਨ ਹੈ ਵਿਸਰਾਏ ਸੋਇਆ ਸਰੋ ਨਨਮੋਖਰ ਕੋ ਸੁਨ ਕੈ ਤਬ ਹੀ ਮਨ ਨਾਇਕ ਚੌਕ ਪਰਿਓ ਹੈ ਧਿਆਨ ਦੀਓ ਤਜ ਕੈ ਸਭ ਹੀ ਤਬ ਹੀ ਰਿਸਕੇ ਤਨ ਸਾਥ ਜਰਿਓ ਹੈ ਤਾਮ ਕੀ ਓਰ ਚਲਿਓ ਉੱਠ ਕੈ ਸੁਰ ਰਾਜ ਲਖਿਓ ਦੁਰਿਓ ਹੈ ਚੌਕ ਰਹੋ ਚਿਤ ਮੋਜ ਕੈ ਹੋਇ ਯਹ ਕੁਕਾਜ ਕਰਿਓ ਹੈ ਇੰਦੋਰਾ ਰਿਖ ਗੌਤਮ ਰਿਸ ਕੈ ਕਹੋ ਕੋ ਆਇਓ ਏ ਧਾਮ ਤਬ ਤੇ ਅਸੁੱਤਰ ਦਿਓ रिकाह विहासी गरिमाम चौपई मां जार एठा जे के आयो तुमको हेर अतक डर पायो चित यात त्रास्त खाट तर दुर्यो मैं मुरजू तोहे साथ विचर्यो टूट के छंद मुनि राज कछु ना भेद लयो त्रिय जो किए सो पति साथ ਤੂੰ ਜਾਏ ਤੀਗ੍ਰਹੂਮ ਕਰੋ ਰਗਭੀਰ ਕੇ ਨਾਮੈ ਕੋ ਉਤਰੋ ਸੁਨ ਬੈਣ ਤਹੀ ਮਨ ਜਾਤ ਪਇਓ ਰਖਨਾਰ ਸੁਰੇਸ਼ ਨਿਕਾਰ ਦਇਓ ਕਈ ਦਿਉਸ਼ ਬਿਤੇਤੇ ਭੇਸਿਉ ਅਤਹੀ ਰਿਸਕੈ ਨਿਜ ਸੀਸ ਤੁਨਿਉ ਤਬਹੀ ਰਿਸਕੈ ਰਖਿ ਸਰਾਪ ਦਿਓ ਸੁਰ ਕੋ ਭਗਵਾਨ ਕੀਓ ਭਗਤ ਆਹੇ ਸੰਸਰ ਤਨ ਮੈ ਤੇਰੇ ਦਸੀਸ ਰਹੋ ਮਨ ਮੈ ਦੁਹਰਾ ਸਰਾਪ ਦੀਐ ਤ੍ਰੀਯ ਕੋ ਬਹੋਰ ਜੋ ਤੈ ਕੀਓ ਚਰਿਤ੍ਰ ਪਾਹਨ ਕੀ ਚਾਰ ਯੁਗ ਉਹ ਹਿਸਲਾ ਅਪਵਿੱਤਰ ਇਤ ਸ੍ਰੀ ਚరిత్ర ਵਿਖਿਆਨੇ ਤ੍ਰਿਆ ਚరిత్రੇ ਭੂਪ ਮੰਤਰੀ ਸੰਵਾਦੇ 115ਵਾਂ ਚరిత్ర ਸਮਾਪਤ ਮਸਤ ਸੁਭ ਮਸਤੇ ਅਭਜੂ ਭੋਜੰਗ ਪ੍ਰਿਆਛ ਬੜਾ ਸੁੰਧ ਅਭ ਭਾਰੀ ਕਰੈ ਤੀਨੂ ਲੋਕ ਜਿਨ ਜੁਹਾਰੀ महा कैतपस्य शिवै से रिझायो मरै नाहे मारे जेह दान पायो चौपी रीज रुद्र जो बचनो चारे तुम न मरो किसु थे मारे जो आपस में हार बढे हो तो जम के घर को दू जए हो महा रुद्र ते जब वर पायो सब लोकन चित ते विसरायो ਜੋ ਕੁਦੈ ਦ੍ਰਿਸ਼ਟਮੈ ਆਵੈ ਜੀ ਲੈ ਕੈ ਫਿਰ ਜਾਨ ਨਾ ਪਾਵੈ ਐਸੀ ਭਾਂਤ ਬਹੁਤੁ ਦਇ ਦੇਵ ਸਵੈ ਬ੍ਰਹਮਾ ਪੈ ਗਏ ਬਿਸ ਵਿਦ ਭੂਰ ਪਠਾਇਓ ਇਹ ਮੰਤਰ ਕੋ ਸਾਰ ਕਰਮਾ ਪ੍ਰਤਿ ਵਿਦਹਿ ਉਚਾਰੋ ਏਕ ਕ੍ਰਿਆ ਤੁਮਹਾਰਿ ਸਵਾਰੋ ਰੂਪવતી ਜਾ ਸਾਮਨੈ ਕੋਈ ਸੋਈ ਦੁਹਰਾ ਬਿਸ ਇਹ ਬਚਨ ਸੁਨ ਧਾਮ ਗਇਓ ਤੇ ਤੁਰਤ ਬਨਾਏ ਤਿਲੋਤ ਮਹ ਆਨਿਓ ਤਹਾਂ ਉਤਾਰ ਬਿਸਕਰਮਾ ਅਬਲਾ ਕਰੀ ਅਮਿਤ ਰੂਪ ਨਿਦ ਸੋਏ ਜੋ ਕੋਏ ਅਮਿਤ ਰੂਪ ਤਾਕੋ ਨਿਰਖ ਸਭ ਅਬਲਾਰ ਸਿਖਾਹੇ ਜਿਨ ਹਮਰੇ ਪਦ ਹੀਰ ਇਹ ਯਾਈ ਕੇ ਖਵੈ ਜਾਹੇ ਐਸੋ ਭੇਖ ਸੋ ਧਾਰ ਤਰੀ ਤਹਾਤੇ ਕੀਓ ਪਿਆਨ ਸ਼ਹਿਰ ਥਨੇਸਰ ਕੇ ਵਿਖੈ ਤੁਰਤ ਪਹੁੰਚੀ ਆਨ ਜਹਾ ਬਾਗ ਤੈਨ ਕੋ ਤੋ ਤਾਹ ਭਉਤੀ ਆਏ ਦੇਵ ਦਾਇ ਤਾ ਕੋ ਨਿਰਖ ਰੂਪ ਰਹੇ ਉਰ ਬਾਲ ਬਹਿਰਤੀ ਬਾਗ ਨਿਹਾਰੀ ਸਵਾ ਛੋਰ ਦੋ ਉਠੇ ਹੰਕਾਰੀ ਪੀਰ ਤਲੋ ਕੇ ਚਲ ਆਏ ਬਿਆਹਨ ਕੋ ਦੂ ਲਚਾਏ ਸੰਤ ਕਹਿਓ ਯਾਕੋ ਮੈਂ ਬਰਹਉ ਕਹਿਓ ਪਸੰਦ ਜਾਏ ਮੈਂ ਕਰਹਉ ਰਾਰ ਪ੍ਰੀਦੂ ਹੰ ਮੈਂ ਭਾਰੀ ਬਿਥਰੇ ਸੂਰਬੀਰ ਹੰਕਾਰੀ ਭਜੰਗ ਛੰਦ ਪਰਿਓ ਲੋਹ ਗਾੜੋ ਮਹਾਬੀਰ ਮੰਡੇ ਝੁਕੇ ਆਨ ਚਾਰ ਉਹਦ ਸਾਖਾ ਡਖਾਡੇ ਛਕੇ ਛੋਬ ਛਤਰੀ ਮਹਾ ਕਾਇ ਮੇਲਾ ਕਿਤੇ ਢਾਲ ਤੇ ਰਸੂਲ ਖੰਗਾਨ ਖੇਲਾ ਸੋਰਠਾ ਬਾਜਨ ਬਜੇ ਅਨੇਕ ਹਰਕਤ ਭਏ ਜੀਵਤ ਬਚਿਓ ਨਾ ਏਕ ਕਾਲ ਬੀਰ ਚਾਬੇ ਸਕਲ ਦੋਰਾ ਜੁਜੇ ਜਜਉਆ ਕੇ ਬਜੇ ਸੂਰ ਬੀਰ ਗਜੇ ਸੁੰਦ ਅਪਸੁੰਦ ਤਵ ਮਿਰਦੰਗ ਬਜਾਏ ਚਉਪੀ प्रथम वार की परी द्वितीय मार सहथनसों धरी तृतीय युद्ध तलवार नु परयो चौथो पीर कटारन करयो दोहरा मुष्ट युद्ध पंचम पयो बरख्यो लोह अपार ऊच नीच कातर सुगट सब कीने एक सार वज्र बाण बरछा बिजू बरखे बिसखे अनेक ऊच नीच कातर सुगट जीतना उब्रयो एक ਚੁਰਿਆ ਗਾਡ ਪਰਿਏ ਪਾਤਾ ਜਦ ਸੁੰਧੁ ਤੈ ਅਪ ਸੁੰਧ ਹਕਾਰੇ ਪਟਸ ਲੋਹਤੀ ਪਰ세 ਅਮਦਾ ਜੁਦ ਲੈ ਕਰ ਕੋ ਪ੍ਰਹਾਰੇ ਰਾਜ ਪਰੇ ਕਹਉ ਤਾਜ ਹੀਰੇ ਤਰਫੈ ਕਹਉ ਪੀਰ ਕਿਰਪਾਨਨ ਮਾਰੇ ਆਪਸ ਮੈਂ ਲਰ ਬੀਰ ਦੂ ਬਸ ਕਾਲ ਪਏ ਕਰਤਾਰ ਸੰਘਾਰੇ ਚੋਬਈ ਆਪਸ ਬੀਜ ਪੀਰ ਲਰ ਮਰੇ ਬਜਰਬਾਨ ਵਿਚੂਨ ਬ੍ਰਿੰਨ ਕਰੇ फूल अनेक मेघ ज्यों बरखे देवराज देमनजुत हरखे दोरा दूहु प्रभात बद कैत्रीया गई ब्रह्मपुर ठाए जय जय कार्य अपार हो हरखे मनसुर राय इथ श्री त्रित्रपख्याने त्रिया चरित्रे भूप मंत्री संभाते 116 वां सो चरित्र समाप्त मस्त शुभ मस्त अफजू ਜੋ ਭਈ ਦਇਤਨ ਤੁੰਬਲ ਜੁਦ ਜਬ ਕੀਨੂ ਦੇਵ ਰਾਜ ਰਹਿ ਕੋ ਮੰਗ ਕਮਲ ਨਾਲ ਭੀਤਰ ਛਵ ਰਹਿਓ ਸਚਿਐ ਆਦ ਕਿਸੂ ਨਹਿ ਲਹਿਓ ਵਾਸਵਕੋ ਖੋਜਨ ਸਭ ਲਾਗੇ ਸਚੀ ਸਮੇਤ ਅ ਸੰਖ ਨੁਰਾਗੇ ਢੂਂਡ ਫਿਰੇ ਕਾਹੂ ਨਹਿ ਪਾਇਓ ਦੇਵਨ ਮਿਤ ਸੋਕ ਉਪਜਾਇਓ ਦੁਬਰਾ ਬਰਸਪਤੀ ਕਉ ਬੋਲਿਓ ਤਬੈ ਸਭ ਹਿਲਕਿਓ ਵਿਚਾਰ ਖੋਜ ਥਕੇ ਪਾਇਓ ਨਹੀਂ ਕਾ ਗਇਓ ਅਦਿੱਤ ਕੁਮਾਰ ਚੋਬੀ ਕਹਿ ਦੋ ਜੂਰ ਖੇਤ ਮੈਂ ਮਰਿਓ ਕਹਿ ਦੋ ਤਰਸਤ ਤਰੀ ਮੈਂ ਦੁਰਿਓ ਪੜਿਓ ਜੋਦ ਤੇ ਅਦਕ ਲਜਾਇਓ ਅਤਿਥ ਗਇਓ ਹੋਇ ਧਾਮ ਨ ਆਇਓ ਬਾਜ ਦੋਹਰਾ ਸੁਕਰਾਚਾਰਜ ਜੋ ਕਹਿਓ ਕੀਜੈ ਯਹ ਵਿਚਾਰ ਰਾਜ ਜੁ ਜਾ ਤਹਿ ਦੀਜੀਐ ਮੰਤਰ ਕੋ ਸਾਰ ਚੌਪੀ ਤ੍ਰਿਦਸ 71 ਸਕਲ ਵੈ ਗਏ ਇੰਦਰਾਤ ਦੇਤ ਜੁ ਤਹਿ ਭੈ ਜਬ ਤਿਨ ਰਾਜ ਇੰਦਰ ਕੋ ਪਾਇਓ ਰੂਪ ਨਿਹਾਰ ਸਤੀ ਲਲਚਾਇਓ ਕਹੋ ਤਾ ਹੈ ਸੁਨ ਸਚੀ ਪਿਆਰੀ ਆਵ ਹੋ ਤੂੰ ਕ੍ਰਿਆ ਹਮਾਰੀ ਖੋਜਤ ਇੰਦਰ ਹਾਥ ਨਾ ਆ ਹੈ ਤਾ ਕਹਿ ਖੋਜ ਕਹੂੰ ਕਾ ਕਹਿ ਹੈ ਰੋਏ ਸਚੀ ਜੋ ਬਚਨ ਉਚਾਰੋ ਗਿਓ ਈਸ ਪਰਦੇਸ ਸਮਾਰੋ ਜੇ हमरे सत کو توں ٹار ہے ماہ نرق کے پیتر پار ہے یا ਪਾਪੀ تج ہے موئے نہی بوہ چنتا ہم رو من مائی تا تے کٹھو چتر بتر وچریے یا کو دور راج تے کریے دوہرا ایک پرتگیا میں کری جو تم کرو بنائے تو ہم کو بیاہو ابے لے گھر جا ہو سہائے چوبیس سواری اپار کی کی جے ਅਦਿਕ ਤਵਾਵਤ ਤਿਨਹਾ ਆਈਐ ਤਮਹ ਹਾਥ ਆਜਿ ਪਈਐ ਤਵੈ ਪਾਲ ਕੋ ਥਾਕੇ ਤਰੁ ਲਾਇਓ ਜਿਉ ਹੋਵੈ ਸ਼ਰਮਤ ਅਸਿੱਤ ਮਨ ਧਾਰਿ ਹੀ ਤਿਉ ਤਿਉ ਕਠਨਕੋਰ ਰੇ ਪਰਿ ਏਕ ਉਦਾਲ ਕੇ ਰੇਖੂ ਤੋ ਦਿਯੋ ਸ਼ਰਾਪ ਰਿਸ਼ਠਾਨ ਤਵਤੇ ਗਿਰੋ ਇੰਦ੍ਰਤ ਤੇ ਪਰਿਓ ਪ੍ਰਿਥੀ ਪਰਿਆਨ ਚਉਪਈ ਇਸੀ ਚਰਿਤਰ ਤੌਨ ਕੋ ਟਾਰਿਓ ਬੋਰ ਇੰਦਰ ਕੋ ਨਿਹਾਰਿਓ ਤਾਹ ਤੇ ਹਨ ਰਾਜ ਤੇ ਦਇਓ ਸੁਰਪੁਰ ਬਹੁਰ ਬਧਾਵੋ ਭਇਓ ਇਤਿ ਸ੍ਰੀ ਚਿਤ੍ਰਪਖਿਆਨੇ ਤ੍ਰਿਆਜ ਰਿਤਰੇ ਭੂਮੰਤਰੀ ਸੰਵਾਦੇ 117 ਹਾ ਚਿਤਤਰ ਸੁਮਾਪਤ ਮਸਤ ਸੁਖ ਮਸਤੇ ਅਕਦਿਉ